ਸਤਗੁਰਾਂ ਨੇ ਪ੍ਰਤੀਤ ਵਾਸਤੇ ਬਹੁਤ ਯਤਨ ਕੀਤੇ ਨੇ ਕਹਿੰਦੇ ਨੇ ਕਰਮ ਕਰਦੇ ਹੋਏ ਵੀ ਇਹ ਪ੍ਰਤੀਤ ਨਾ ਬਣੇ ਤੇ ਇਹ ਭਾਵੇਂ ਦੁਨੀਆਂ ਦੇ ਉੱਤੇ 100 ਵਾਰੀ ਵੀ ਆ ਜਾਵੇ ਇਹਨੂੰ ਸੁਖ ਦੀ ਬਣ ਸਕਦਾ ਇਹਨੂੰ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਿਉਂਕਿ ਸਤਗੁਰੂ ਤੇ ਪ੍ਰਤੀਤ ਨਹੀਂ ਬਣੀ ਸਤਗੁਰੂ ਕੀ ਪ੍ਰਤੀਤ ਨਾ ਆਈਆ ਸ਼ਬਦ ਨਾਲ ਲੱਗੋ ਪਾਓ ਤੇ ਪਾਤਸ਼ਾਹ ਕਹਿੰਦੇ ਨੇ ਉਸ ਨੂੰ ਸੁੱਖ ਨਾ ਉਪਜੈ ਭਾਵੇਂ 100 ਜਿਹੜਾ ਆਵੋ ਜਾਓ ਭਾਵੇਂ ਦੁਨੀਆ ਤੇ 100 ਜਨਮ ਧਾਰ ਲੈ ਬਿਨਾ ਪ੍ਰਤੀਤ ਤੋਂ ਇਹਨੂੰ ਪ੍ਰਾਪਤੀ ਨਹੀਂ ਕਿਸੇ ਗੱਲ ਦੀ ਹੋਈ ਸੁੱਖ ਨਹੀਂ ਹੋ ਸਕਦਾ ਐਸਾ ਹੋਇਆ ਕਬੀਰ ਭਗਤ ਦੇ ਕੋਲ ਕੁਝ ਮੁਸਲਮਾਨ ਇਕੱਠੇ ਹੋ ਕੇ ਆਏ ਘਰ ਬੈਠੇ ਸਨ ਇਹ ਇਹ ਸਨ ਮੱਕੇ ਦਾ ਹੱਜ ਕਰਨ ਵਾਸਤੇ جا کے انہوں نے ਆਖਿਆ صلاح ਕੀਤੀ بھئی اس طرح کریے کبیر ਨੂੰ ਨਾਲ ਲੈ چلیے سਿਆਣਾ ਬੰਦਾ ਨਾਲ ਲੈ ਚਲੋ ਇਹਨੂੰ گئے ਭਈ چل کبیر ਤੈਨੂੰ ਹਜ ਕਰਨ ਚੱਲੇ ਆ ਮੱਕੇ ਦਾ ਤੈਨੂੰ ਨਾਲ ਲੈ ਚਲੀਏ کبیر ਜੀ ਨਾ ਕਰ ਦਿੱਤੀ کبیر ਕਹਿੰਦੇ ਨੇ اس طرح ਕਰੋ ਤੁਸੀਂ ਮੱਕੇ ਦਾ ਹਜ ਕਰਿਓ ਮੈਂ ਮੈਂ ਨਹੀਂ ਜਾਣਾ ਕਰਨ ਵਾਸਤੇ ਕਿਉਂ ਨਹੀਂ ਜਾਣਾ ਕਬੀਰ ਨੇ ਆਖਿਆ ਮੈਂ ਇੱਕ ਵਾਰੀ ਗਿਆ ਸੀ ਮੱਕੇ ਦਾ ਹਜਰ ਕਰਨ ਵਾਸਤੇ ਤੇ ਖੁਦਾ ਮੈਨੂੰ ਰਾਹ ਮਿਲ ਪਿਆ ਸੀ ਤੇ ਉਸ ਨੇ ਪੁੱਛਿਆ ਭਈ ਤੂੰ ਕੌਣ ਹੈ ਮੈਂ ਆਖਿਆ ਜੀ ਮੈਂ ਕਬੀਰ ਕਹਿੰਦੇ ਨੇ ਮੈਨੂੰ ਕਿੱਥੇ ਚੱਲਿਆ ਮੈਂ ਆਖਿਆ ਜੀ ਮੈਂ ਮੱਕੇ ਦਾ ਹਜਰ ਕਰਨ ਵਾਸਤੇ ਚੱਲਿਆ ਉੱਥੇ ਕੀ ਹੈ ਕਹਿੰਦੇ ਰ ਉੱਥੇ ਖੁਦਾ ਰਹਿੰਦਾ ਕਬੀਰ ਕਹਿੰਦੇ ਨੇ ਮੈਨੂੰ ਬਹੁਤ ਡਾਂਟ-ਡਬਟ ਕੀਤੀ ਮੇਰੇ ਨਾਲ ਲੜ ਪਿਆ ਖੁਦਾ ਤੇ ਮੈਂ ਤੇ ਉਦੋਂ ਦਾ ਮੁੜ ਕੇ ਜਾਣਾ ਬੰਦ ਕਰ ਦਿੱਤਾ ਭਈ ਜਾਣਾ ਹੀ ਕੀ ਲੈਣਾ ਕਿਸ ਤਰ੍ਹਾਂ ਮਿਲਿਆ ਸੀ ਕਬੀਰ ਕਹਿੰਦੇ ਨੇ ਕਬੀਰ ਹਜ ਕਾਬੇ ਹਾਂ ਜਾਏ ਥਾ ਆਗੇ ਮਿਲਿਆ ਖੁਦਾਏ ਰਸਤੇ ਵਿੱਚ ਹੀ ਖੁਦਾ ਮਿਲ ਪਿਆ ਤੇ ਫਿਰ ਕੀ ਹੋਇਆ ਕਹਿੰਦੇ ਨੇ ਸਾਈ ਮੁਜ ਸਿਓ ਲੜ ਪਰਿਆ ਤੁਝੈ ਕਿਨ ਫਰਮਾਈ ਗਾਇ ਜਦੋਂ ਮੈਂ ਆਖਿਆ ਵੀ ਮੈਂ ਖੁਦਾ ਦਾ ਦਰਸ਼ਨ ਮੱਕੇ ਕਰਨ ਚੱਲੇ ਆ ਆਖਿਆ ਤੈਨੂੰ ਕਿਹੜੇ ਪੜੂਏ ਦੇ ਆਖਿਆ ਵੀ ਮੈਂ ਮੱਕੇ ਵਿੱਚ ਰਹਿਂਦਾ ਮੈਂ ਇੱਥੇ ਹਰ ਜਗ੍ਹਾ ਤੇ ਤੈਨੂੰ ਕਿਸ ਇਹ ਜਗ੍ਹਾ ਦੱਸੀ ਮੇਰੇ ਨਾਲ ਲੜ ਪਿਆ ਖੁਦਾ ਮੈਂ ਨਹੀਂ ਜਾਣਾ ਤੁਸੀਂ ਜਾਓ ਉਹਨਾਂ ਫੇਰ ਵੀ ਕੁਝ ਜਿੰਦ ਕੀਤੀ ਆਖ ਲਗੇ ਨਹੀਂ ਨਹੀਂ ਤੇਰੇ ਤੋਂ ਬਗੈਰ ਅਸਾਂ ਨਹੀਂ ਜਾਣਾ ਤੈਨੂੰ ਜ਼ਰੂਰ ਨਾਲ ਲੈ ਕੇ ਜਾਣਾ ਕਹਿੰਦਾ ਉਹ ਗਲੋਂ ਲਾਉਣ ਵਾਲੀ ਗੱਲ ਕੀਤੀ ਕਹਿੰਦਾ ਕਬੀਰ ਕਹਿੰਦਾ ਤੁਸੀਂ ਜਾਓ ਮੇਰਾ ਮੱਕਾ ਹੋ ਰਿਹਾ ਹੈ ਤੁਹਾਡਾ ਮੱਕਾ ਹੋ ਰਿਹਾ ਹੈ ਮੇਰੇ ਮੱਕੇ ਵਿੱਚ ਤੁਹਾਡੇ ਮੱਕੇ ਵਿੱਚ ਫਰਕ ਹੈ ਮੈਂ ਉੱਥੇ ਨਹੀਂ ਜਾਣਾ ਕਬੀਰ ਹਜ ਕਾਬੇ ਹੋਏ ਹੋਏ ਗਿਆ ਕੀਤੀ ਕਬੀਰ ਜਾਓ ਚਲੇ ਜਾਓ ਮੈਂ ਕਈ ਵਾਰੀ ਹੱਜ ਕਰਕੇ ਆਇਆ ਫੇਰ ਕੀ ਹੋਇਆ ਕਹਿੰਦਾ ਸਾਈ ਮੁੱਜ ਮੇਂ ਕੀਆ ਖਤਾ ਮੁੱਖੋ ਨਾ ਬੋਲੇ ਪੀਰ ਪਤਾ ਨਹੀਂ ਕੀ ਗੁਨਾਹ ਹੋ ਗਿਆ ਮੇਰੇ ਨਾਲ ਉਦੋਂ ਦਾ ਬੋਲਦਾ ਹੀ ਨਹੀਂ ਜਦੋਂ ਦਾ ਲੜਿਆ ਹੋਇਆ ਮੈਂ ਨਹੀਂ ਜਾਣਾਂ ਉਹਨਾਂ ਨੇ ਆਖਿਆ ਇਹ ਜਿਹੜਾ ਮੱਕਾ ਦੱਸ ਨਾ ਇਹਦੇ ਵਿੱਚ ਕੋਈ ਰਾਜ ਹੈ ਪੁੱਛੋ ਇਹਨੂੰ ਤੇਰਾ ਮੱਕਾ ਕਿਹੜਾ ਹੈ ਉਹਨਾਂ ਪੁੱਛਿਆ ਜਿੱਥੇ ਤੂੰ ਹੱਜ ਕਰਕੇ ਆਉਣਾ ਉਹ ਕਿਹੜਾ ਮੱਕਾ ਸਾਨੂੰ ਵੀ ਦੱਸ ਅਸੀਂ ਉੱਥੇ ਚਲੇ ਜਾਈਏ ਕਬੀਰ ਨੇ ਆਖਿਆ ਤੁਹਾਡੇ ਅੰਦਰ ਪ੍ਰਤੀਤ ਹੈ ਨਹੀਂ ਤੂੰ ਸਾ ਜਾਣਾ ਨਹੀਂ ਉੱਥੇ ਕਬੀਰ ਨੇ ਦੱਸਿਆ ਕਬੀਰ ਕਹਿੰਦੇ ਨੇ ਹੱਜ ਹਮਾਰੀ ਗੋਮਤੀ ਤੀਰ ਜਹਾਂ ਬਸਿਆ ਪੀਤੰਬਰ ਪੀਰ ਐ ਗੋਮਤੀ ਦੇ ਕਿਨਾਰੇ ਤੇ ਮੇਰਾ ਸਤਿਗੁਰੂ ਰਹਿੰਦਾ ਗੁਰੂ ਮੇਰਾ ਰਹਿੰਦਾ ਮੇਰਾ ਤੇ ਹੱਜ ਉੱਥੇ ਹੋ ਜਾਂਦਾ ਕਈ ਵਾਰੀ ਕਰਕੇ ਆਇਆ ਮੈਂ ਮੇਰਾ ਹੱਜ ਮੇਰੇ ਗੁਰੂ ਕੇ ਚਰਨਾਂ ਵਿੱਚ ਹੈ ਸਤਿਗੁਰੂ ਤੱਕ ਪਹੁੰਚਾ ਸਤਿਗੁਰੂ ਤੇ ਪ੍ਰਤੀਤ ਹੈ ਮੇਰਾ ਹੱਜ ਕਈ ਵਾਰੀ ਮੈਂ ਹੱਜ ਕੀਤਾ ਹੈ ਉਨਾ ਕੇ ਉਹਦਾ ਕੁਝ ਨਿਸ਼ਾਨੀ ਦੱਸ ਕੈਸਾ ਹੈ ਕਹਿੰਦਾ वाहो ਵਾਹੋ ਕਿਆ ਖੂਬ ਗਾਉਂਦਾ ਹੈ ਹਰਕਾ ਨਾਮ ਮੇਰੇ ਮਨ ਭਾਵਤਾ है मेरा ਸਤਿਗੁਰੂ रागी है मेरा ਸਤਿਗੁਰੂ ਕੌਣ ਵਾਲਾ है मेरा ਸਤਿਗੁਰੂ ਉਪਦੇਸ਼ ਦਿੰਦਾ ਹੈ ਮੇਰਾ ਸਤਿਗੁਰੂ ਬੋਲਣ ਵਾਲਾ ਹੈ ਉਥੇ ਐਸਾ ਹੈ ਮੇਰਾ ਹੱਜ ਉਹਦੇ ਚਰਨਾਂ ਵਿੱਚ ਹੈ ਮੇਰੀ ਦੌੜ ਉਹਦੇ ਤੱਕ ਹੈ ਮੇਰੀ ਪ੍ਰਤੀਤ ਗਰੂਤੇ ਹੈ ਮੈਂ ਇਸ ਵਾਸਤੇ ਮੱਕੇ ਨਹੀਂ ਜਾਣਾ ਕੋਈ ਹੋਰ ਨਿਸ਼ਾਨੀ ਹੈ ਕਹਿੰਦੇ ਨੇ ਹੈ ਹੋਰ ਕੀ ਨਿਸ਼ਾਨੀ ਐ ਕਹਿੰਦਾ ਕੰਠੇ ਮਾਰਾ ਜਿਹਵਾ ਰਾਮ ਸਹੰਸ ਨਾਮ ਲੈ ਲੈ ਕਰੋ ਸலாம் ਉਹਦੇ ਗਲ ਵਿੱਚ ਵਾਲਾ ਹੈ ਰਸਨਾ ਤੇ ਰਾਮ ਦਾ ਨਾਮ ਹੈ ਐਸਾ ਮੇਰਾ ਸਤਿਗੁਰੂ ਹੈ ਜਿਹੜਾ ਆਪ ਨਾਮ ਜਪਦਾ ਤੇ ਜਪਾਉਂਦਾ ਹੈ ਮੈਂ ਅਰਜ ਕਰ ਰਿਹਾ ਸਾ ਉਹਨਾਂ ਨੂੰ ਠੁਕਰਾ ਦਿੱਤਾ ਪ੍ਰਤੀਤ ਵਾਲਾ ਸੀ ਸਤਿਗੁਰੂ ਵਾਲਾ ਸੀ ਪੁਰਾਣੇ ਜ਼ਮਾਨੇ ਦੀ ਇੱਕ ਕਥਾ ਆਈ ਹੈ ਹਰਿਮਾਨ ਬਾਹਰ ਬੈਠਾ ਸੀ ਕਿਤੇ ਇਹਨੂੰ ਪੁੱਛਿਆ ਹਰਿਮਾਨ ਤੂੰ ਭਗਵਾਨ ਦਾ ਸੇਵ ਸੇਵਕ ਰਿਆ ਤੈਨੂੰ ਬੜਾ ਵੱਡਾ ਵੱਡਾ ਭਗਤ ਮੰਨਿਆ ਜਾਂਦਾ ਹੈ